ਬੜਪਾ ਵੀ ਤੇ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਣੇ ਬੜਪਾ ਕੀ ਤੇ ਜਗ ਰਗ ਮਾਹੇ ਉਹ ਸਾਰੇ ਜਗ ਬੜਪਾ ਨੇ ਜਗ ਵਿੱਚ ਜਿਹੜੇ ਹਰ ਗੁਣ ਗਾਉਂਦੇ ਸਦਾ ਸਦਾ ਹਰ ਗੁਣ ਗਾਣ ਸਦਾ ਸਦਾ ਗਾਉਂਦੇ ਨਾ ਇਹ ਨੂੰ ਰੋਦੇ ਗਾਦੇ ਆ ਸਾਡੇ ਜਿੰਨੇ ਮਗਰ ਉਹ ਆ ਇਹਨਾਂ ਦੇ ਬਣੇ ਨੇ ਰਾਜਾ ਖੰਦੇ ਬੋਵਾ ਕੁਝ ਟੈਂਬਲ ਹੈ ਸੰਭਭ ਨਹੀਂ ਬਿਲਕੁਲ ਨਹੀਂ ਸਦਾ ਸਦਾ ਹਰ ਕਰਉਂਦਾ ਹੈ ਇਹ ਜੋ ਅਸੀਂ ਫਰਿਆਦਾ ਭਾਈ ਜਾਏ ਤੁਹ ਪਰ ਤਾਂ ਸਦਾ ਸਦਾ ਆ ਜੋ ਆ ਸਾਹਮਣੇ ਇਹ ਤਾਂ ਪਤਰਾ ਨਹੀਂ ਹੁੰਦੀ ਅਸੀਂ ਪਤਰਾ ਆ ਗਏ ਜੇਕਰ ਕਿ ਰਾਮ ਨਾਮ ਜੋ ਕਰੇ ਵਿਚਾਰ ਸੇਤਨਵੰਤ ਗਨੀ ਸੰਸਾਰ ਰਾਮ ਨਾਮ ਜੋ ਕਰੇ ਵਿਚਾਰ ਸਾਧਾਂ ਦੇ ਵਿਚਾਰ ਕਰਦੇ ਨੇ ਉਹ ਧਨਵੰਤ ਗਏ ਜਾਂਦੇ ਨੇ ਸੰਸਾਰ ਚ ਸਾਧਾ ਤੋਂ ਧਨਵੰਤ ਗਏ ਜਾਂਦੇ ਨੇ ਉਹ ਹੀ ਧਨਵੰਤ ਹੁੰਦੇ ਨੇ ਸਾਧਾ ਚ ਗਨੀຊਾਂ ਸੋ ਬਿੜਤੀ ਦੇ ਕਿੱਥੋਂ ਸਾਧਖੰਦ ਦੀ ਗਿਲਤੀ ਉਹ ਧਨਵੰਤ ਰਹੇ ਸਾਧਖਾਂ ਦੇ ਫਾਇਦਿਆਂ ਵਿੱਚ ਸਾਧਖਾਂ ਦੇ ਕਾਰਿਆਂ ਵਿੱਚ ਉਹ ਤਾਂ ਹਸਣੇ ਜਿਹੜਾ ਆਨੰਦ ਕਰੇ ਵਿਚ ਜਿਹੜੇ ਰਾਮ ਰਾਮ ਦੇ ਵਿਚਾਰ ਕਰਦੇ ਰਹਿੰਦੇ ਉਹਨਾਂ ਦਾ ਉੱਥੇ ਨਾ ਧੰਨਵਾਦਾਂ ਵਿੱਚ ਆ ਲਿਸਟ ਵਿੱਚ ਐਥੇ ਜਿਹੜੇ ਨੇ ਐਥੇ ਦਾ ਕੋਈ ਹੋ莱 ਉਹ ਤਾਂ ਸੁਖੀ ਬਣੀ ਉਹਥੇ ਧੰਨਵਾਦ ਦੀ ਗੱਲ ਨਹੀਂ ਐਥੇ ਆ ਲੈ ਤੁਹਾਨੂੰ ਤਾਂ ਕੌਡੀਆਂ ਬੰਦੇ ਆ ਅਸੀਂ ਇਹ ਤੁਹਾਨੂੰ ਤਾਂ ਨਹੀਂ ਬੰਦੇ ਉੱਥੇ ਚੱਲਦਾ ਹੀ ਹੈ ਤੇ ਘੱਟਾ ਤੁਹਾਨੂੰ ਉਹ ਸਾਚੇ ਦਾ ਦੀ ਗੱਲ ਕਰਦੇ ਦਰਗਾਹ ਵਿੱਚ ਸਾਜਾ ਤਾਂ چلਦਾ ਹੈ ਇਹ ਚੱਲਦਾ राम नाम ਦੀ ਵਿਚਾਰ ਕਰਨ ਹੋਗਾ ਬਿਨਾ ਹੈਗਾ ਉਹ ਤਾਂ ਹੰਦ ਗਏ ਜਾਂਦਾ ਦਰਗਾਹ 'ਚ ਉਹਨੇ ਕੋਲ ਕਿੰਨਾ ਤਾਂ ਹਾਂ ਉਹ ਬਤਾਉਂਦਾ ਜਦੋਂ ਫਿਰ ਕੋਈ ਕੰਮ ਕੋਈ ਕਾਬਲੀਅਤ ਹੈ ਉਹ ਤਾਂ ਹੋਦਾ ਅਸਲ ਵਿੱਚ ਕਾਬਲੀਅਤ ਗਿਆਨ ਇਹ ਨਾਲ ਕਾਬਲੀਅਤ ਹੁੰਦੀ ਹੈ ਜਾਂ ਇਹ ਵੀ ਖੁਦ ਹੋਦੀ ਹੋਈ ਹੈ ਕਾਬਲੀਅਤ ਹੁੰਦੀ ਹੈ ਜਿਹੜੇ ਦੇ ਗੁਣ ਹੁੰਦੇ ਨੇ ਉਹ ਹੀ ਜਿਹੜੀ ਕਾਬਲੀਅਤ ਦਿੱਤੀ ਹੈ ਉਹ ਦੀ ਕਾਬਲੀਅਤ ਅਸਾਫ ਨਾਲ ਫਿਰ ਹੋ ਉਹ ਤੇ ਕਾਬਲੇ ਤੇ ਆਪਣੇ ਲੋਕ ਦੀ ਕਾਬਲੀਅਤ ਦਾ ਸਾਹਮਣਾ ਅਸਰ ਬਣਦੇ ਜੋ وہاں ਸਰਕਾਰ ਚਲ ਹੈ ਕਾਬਲੀਅਤ ਦੇ ਸਾਹਮਣੇ ਬੰਦਿਆਂ ਨੂੰ ਜਿਹੜੇ ਟੱਕਰ ਪਾਏ ਟੱਕਰ ਤੇ ਲੈ ਜਿਵੇਂ ਜਿਹੜੇ ਬੰਨਾ ਹੈ ਡੀਸੀ ਬੰਨਾ ਹੈ ਹੋਰ ਬੰਨਾ ਤਹਿਸੀਲਦਾਰ ਬੰਨਾ ਹੈ ਖੰਡਦਾਰ ਅਧਿਕਾਰੀ ਨੇ ਕਾਬਲੀਏ ਦੇ ਸਾਫਰੇ ਤੇ ਮੁਤਾਹਿਦਾਂ ਕਰਕੇ ਲਿਖੀ। ਇਹ ਵੀ ਬਰੇ ਸੱਚਾ। ਉਹ ਆਪਣਾ ਫੈਸਲਾ ਚਲਾਉਦਾ। ਜਿਸ ਕੋਈ ਡਿਊਟੀ ਹੈ ਉਸ ਕੋਈ ਡਿਊਟੀ। ਉਹਦਾ ਧਰਮ ਵੀ ਚੱਲਦਾ ਰਹੇ। ਉਹਦੀ ਸਿਕਿਆ ਵੀ ਚੱਲਦੀ ਹੈ। ਅੱਛਾ। ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ। ਮਨ ਤਨ ਮੁਖ ਬੋਲੇ ਹਰ ਮੁਖੀ। ਪਰ ਜਿਹੜਾ ਦਲਾਤਾ ਹਾਂ। ਬੋਦ ਦਾ ਤਰੀ ਦਾ ਉਹਦੇ ਮੂਹ ਨਾਲ ਜਿਹੜਾ ਬੋਲਦਾ ਹੈ ਨਾ ਮਾਸਾ ਨਾ ਉਹ ਕੋ ਖ ਭੋਲੇ ਬੋਲੇ ਹਰ ਮੁਖੀ ਉਹ ਹਰ ਮੁਖੀ ਉਹਦਾ ਹਭ ਉਜਲਾ ਹਰਾਇਆ ਉਹ ਖੜਿਆ ਬਾਗ ਵਕੂਣਾ ਉਹ ਉਹਦੇ ਉਹਦੀ ਜੁੜ ਕੇ ਜਿਹੜੇ ਭੁਜ ਮਤਲਬ ਹੈ ਜਿਹੜੇ ਸੁੱਕੇ ਹੋਏ ਹਨ ਉਹ ਹਰੇ ਹੋ ਜਾਂਦੇ ਇਹਨਾਂ ਨੂੰ ਬਿਆਦ ਹੋ ਗਿਰਾਂ ਤੇ ਸਾਥ ਨੂੰ ਕੁਝ ਮਿਲਣਾ ਨਹੀਂ ਹੁਣ ਉਹਨਾਂ ਦੀ ਆਸ ਵਜਤ ਦੀ ਦੁਬਾਰਾ ਹਰੇ ਹੋ ਜਾਂਦੇ ਸਿੱਤੇ ਦਾ ਸੋਹਣਾ ਜੇਲਾ ਕਹਿੰਦਾ ਵੀ ਹਮ ਤਾਂ ਵੀ ਮੇਰੀ ਸਾਰੀ ਜੀਤ ਹੈਂ ਹਾਂਜੀ ਉੱਤਾਂ ਰੱਬ ਹੀ ਬਣ ਸਕਦਾ ਹਰ ਕੋਈ ਵੀ ਚਲਾ ਜਾਵੇ ਤਾਂ ਹਰ ਬੋਲਣਾ ਹਰ ਮੁਖੀ ਉੱਥੇ ਵੀ ਹਰਾ ਹੋ ਜਾਂਦਾ ਸਦਾ ਸਦਾ ਜਾਨੋ ਦੇ ਦੋ ਨੂੰ ਇਹਦੀ ਆਦਿ ਜੀ ਵੀ ਬਦ ਸਭ ਤੋਂ ਬਾਅਦ ਕੁਝ ਹੋਰ ਵੀ ਤੋੜਦੇ ਨਹੀਂ ਬਹੁਤ ਗੱਲ ਤੋੜਦੇ ਹੁਣ ਸਵੇਰ ਨੂੰ ਕਹਿੰਦਾ ਇਸ ਜੇ ਇਚਾ ਹੋਵੇ ਤਾਂ ਕੋਈ ਨਾ ਕੋਈ ਹੁੰਦੀ ਉਹਦੇ ਨਾਲ ਛੀਂ ਵੀ ਬਾਤ ਛੀਂ ਗੁਣਾਂ ਨਾਲ ਗੱਲ ਨਹੀਂ ਪਤਾ ਨਹੀਂ ਉਹ ਤੋੜਦਾ ਰੁੱਤ ਗਈ ਸੀ ਪਰ ਸੱਤ ਪਰ ਸੀ ਜੇ ਸਾਡੇ ਤਾਂ ਸਭ ਤੋਂ ਸਿਆਰ ਨਹੀਂ ਜੀ ਪਤਾ ਨਹੀਂ ਕਿ ਕਿਹਦੇ ਮਾਨ ਮੰਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਣੋ ਤੇ ਸੁਖੀ ਸਦਾ ਸਦਾ ਜਾਣਦੇ ਸੁਖੀ ਉਹ ਸਦਾ ਸੁਖੀ ਨੇ ਜੀਣਾ ਆਗਾ ਇਹ ਆਹ ਬੋਲਤੇ ਰਿਚੋ ਹਰ ਕੀ ਕਰੇ ਜੁੜ ਲੀਏ ਜੋ ਵਿਚਤ ਹੈ ਗਾ ਲੋ ਜਦ ਹਰ ਕੀ ਤਥਾ ਤੇ ਸਵਾ ਕੋਈ ਹੋਰ ਗੱਲ ਕਰਦੀ ਵੀ ਉਹ ਹਰ ਮੁਖੀ ਦੇ ਹਰੇ ਕੋ ਅੰਦਰੋਂ ਨੇ ਸੁਦਾ ਸਦਾ ਸਦਾ ਜਾਣਦੇ ਸੁਖੀ ਉਹ ਸਭ ਤੇ ਸੜਾਈ ਨੂੰ ਸਦਾ ਸੁਖਾ ਆਵਾਜਾ ਦਾ ਅੱਖਰ ਸਦਾ ਸੁਖਾ ਉਹ ਇੱਕ ਵਿਅਕਤੀ ਇਹ ਭੋਗ ਕਰਕੇ ਕਾ ਰਹੇ ਜਿਹਦੇ ਚ ਆ ਲੱਛਣ ਹੋ ਸਰੂਪੀ ਹਦਾ ਉਹ ਇੱਕ ਸਰਬ ਸੁਗੇ ਆਦਮੀ ਕੌਣ ਹੋਰ ਹੱਸਦਾ ਉਹਦੇ ਲੱਛਣ ਦੱਸੇ ਇਹਨਾਂ ਬਿਮਾਰੀਆਂ ਦੇ ਲੱਛਣ ਕੋਈ ਜੇ ਟੈਪਰੇਚਰ ਵੀ ਹੋਵੇ ਪਾੜਾ ਲੱਗਦਾ ਹੋਵੇ ਬਰੇਰੀਆ ਇਹ ਇਹ ਗੁਰੂ ਆਪਣਾ ਪਤਾ ਦੱਸਿਆ ਹੈ ਭਈ ਗੁਰਮੁਖ ਤੇ 89 ਕੇ ਮਨੁਖ ਸਾਬੂ ਕੀਤਾ ਹੈ ਗੁਰਮੁਖ ਦੇ ਗਉਂ ਦੱਸ ਕੇ ਗੁਰਮੁਖ ਸਾਬੂ ਕੀਤਾ ਹੈ ਇਹ ਅਜਿਹਾ ਪਛਾਣਾ ਹੈ ਇੱਕੋ ਇੱਕ ਪਛਾਣਾ ਹੈ ਇਹ ਤੋਂ ਕੀ ਉਹ ਸੋਝੀ ਜਾਣਾ ਇੱਕੋ ਇੱਕ ਇੱਕ ਇਹ ਸੋਪੇ ਅੰਦਰ ਬ੍ਰਹਮ ਪ੍ਰਭੂ ਤੁਹਾਨੂੰ ਲਿਆ ਉਹਨੇ ਹਰ ਗੱਲ ਨੂੰ ਹਰ ਜੂ ਮੈਨੂੰ ਪਛਾਣ ਲਿਆ ਇੱਕੋ ਏਕ ਹੈ ਤੁਹਾਨੂੰ ਤੇ ਸਾਰਿਆਂ ਦੇ ਵਿੱਚ ਏਡਾ ਏਕ ਹੈ ਜਿਵੇਂ ਚੰਦ ਸਾਹਮਣੇ ਚੰਨ ਹੋਵੇ ਸਾਰਿਆਂ ਦੇ ਵਿੱਚ ਹਜੂਬ ਹਾਜ਼ਰ ਸਾਰਿਆਂ ਦੇ ਘਰ ਕੇ ਆਪ ਬੋਲਦਾ ਜਿਹੜਾ ਉਹਨੂੰ ਹਜੂਬ ਕਹਿੰਦਾ ਹੈ ਰਾਮਕਾਲ ਉਹ ਵਾਲੇ ਕੋਈ ਇਹਨਾਂ ਦੇ ਘੋੜਵਾਂ ਦਾ ਧੌਂਗ ਹੀ ਆਦੀ ਦੀ ਸਾਡੇ ਕੋਲ ਵੀ ਗੁਰੂ ਹੋਵੇ ਸਾਡੇ ਕੋਲ ਥ੍ਰੀ ਰਹਦਾ ਹੀ ਦੇ ਕੋਏ ਤੇ ਇੱਕ ਪਛਾਨ ਇਹ ਤੁਸ ਕੀ ਉਹ ਸੋਧੀ ਜਾਏ ਇਹ ਤੁਸ ਕੀ ਉਹ ਲੋਕ ਪਰਲੋਕ ਦੋਹਾਂ ਦੇ ਲੋਕ ਪਰਲੋਕ ਦਾ ਕੀ ਹੈ ਉਹ ਆ ਇਹ ਤੁਸ ਉਹ ਸੋਧੀ ਜਾ ਨਾਮ ਸੰਗੀ ਜਿਸ ਮਨ ਮੰਨਿਆ ਨਾਨਕ ਤਿਨੇ ਨਿਰੰਝਨ ਜਾਂਦਾ ਨਾਮ ਸਰ ਕੀ ਜਿਸ ਮਨ ਮੰਨਿਆ ਨਾਮ ਦੀ ਸੰਗਤ ਵਿੱਚ ਰਹਿ ਕੇ ਨਾਮ ਨਾਲ ਜੁੜੇ ਰਹਿਣ ਕਰਕੇ ਨਾਮ ਨਾਲ ਜੁੜਨ ਵਾਸਤੇ ਨਾਮ ਨਾਲ ਜੁੜੇ ਰਹਿਣ ਵਾਸਤੇ ਜਿਸ ਦਾ ਪਰਮਾਤਮਾ ਨਾਨਕ ਜੀ ਨੇ ਨਿਰੰਜਨ ਜਾਨਾ ਨਾਮ ਦੀ ਸੰਗਤ ਕਰਨ ਦਾ ਜਿਹਦਾ ਮਨ ਵੱਧ ਗਿਆ ਨਾਨਕ ਜੀ ਨੇ ਨਿਰੰਜਨ ਉਹਨੇ ਨਿਰੰਜਨ ਜਾਣਦੇ ਰੋਝੜ ਕੌਣ ਹੈ ਉਹ ਆਪੇ ਰੋਝੜ ਨਾਨਕ ਜੀ ਨੇ ਨਿਰੰਜਨ ਪਾਵਨ ਨੂੰ ਜਾਨੋ ਹੁਕਮ ਤੋਂ ਵੀ ਜਾਨਕ ਤੋਂ ਵੀ ਆਪਣਾ ਬੁਜਾਓ ਉਹ ਜਾਣੋ ਕਿ ਆਂ ਜਦ ਇੱਕ ਰਾਇਆ ਆ ਕੇ ਕੋ ਜਾਵੇ ਜਾਨਣਾ ਇੱਕ ਰਾਇਆ ਆਇਆ ਇੱਕ ਕੋ ਜਾਵੇ ਆਪ ਜਾਨੇ ਵੀ ਮਾਣੋ